ਸ਼ਲੋਕ ਮਹੱਲਾ ਪੰਜਵਾਂ ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ ਤੇ ਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉਦਮ ਕਰਿੰਦਿਆਂ ਜਿਉ ਤੂੰ ਬਾਹਰ ਦੇ ਕਰਕੇ ਜੋ ਕੰਮ ਕਰ ਲੈ ਸਰੀਰ ਕਰਕੇ ਕੰਮ ਕਰ ਲੈ ਉਦਮ ਉਦਮ ਦੂਖ ਨਾ ਨਹੀਂ ਕੀਤਾ ਵੇਲਾ ਨਹੀਂ ਰਹਿਣਾ ਘਾੜਾ ਫੇਰਦੇ ਰਹਿ ਲਈ ਖਾਂ ਖਾ ਬੈਠ ਕੇ ਫਕੀ ਕਰਨੀ ਕੁਰਬੁੱద్ధి ਫਕੀ ਨਹੀਂ ਹੈ ਉਹ ਭੰਡਵਾਸ ਉਦਮ ਕਰਨਦੇ ਆ ਜਿਉ ਤੂੰ ਸੁਖ ਕੋਲ ਕਮਾਈ ਕਰ ਸਰੀਰ ਤੇ ਸਭੂਡ ਵਾਸਤੇ ਜੇ ਉਹ ਕੋ ਚ ਕਮਾਈ ਦਾ ਸੁਹੀ ਆਊਗਾ ਤੈਨਾਂ ਤੂੰ ਪਰਮੂ ਬੇਨ ਤਿਆਨਗਾ ਜਿ ਰੱਖ ਵਾਸਪਾੜ ਕਰ ਤਬ ਸਭ ਕੀ ਤੇ ਦਿਲ ਨਾਲ ਕਹਿਂਦਾ ਤੂੰ ਪ੍ਰਭੂ ਮੈਨੂੰ ਨਾਨਕ ਉਪਦੇਸ ਦਿੱਤੋ ਇਹ ਤੀਕਰ ਸਰੀਰ ਉਤਰ ਗਈ ਤੇਰੇ ਕੰਮ ਇਕੱਠੇ ਹੋਈ ਜਾਂਦੇ ਠੀਕ ਚੋਰੀ ਹੋ ਸਕਦਾ ਦੋਏ ਕੰਮ ਇਕੱਠੇ ਜੇ ਬੋਰਡ ਕਾਰ ਚਲਾਉਂਦਾ ਕਲਪਨਾ ਕਰ ਸਕਦਾ ਹੈ ਕਾਰ ਚਲਾਉਂਦਾ ਸਭ ਤੋਂ ਵਿਚਾਰ ਕਿਉਂ ਕਰ ਸਕਦਾ ਇਹ ਬੁੱਧੀਮਾਨ ਬੋਟਾ ਕਲਪਨਾ ਕਰ ਸਕਦਾ ਹੈ ਹੋਰ ਸੁਪਨੇ ਦੇਖ ਸਕਦਾ ਹੈ ਗਾਹ ਪਿਆਨ ਤੇ ਸ਼ਬਦ ਵਿਚਾਰ ਵੀ ਕਰ ਸਕਦਾ ਕਰ ਸਕਦਾ ਕਰਦੇ ਦੀ ਹੋਵੇ ਵਿਚਾਰ ਵੀ ਹੋਵੇ ਦਸਿਆ ਨਹੀਂ ਕਿਸੇ ਦੇ ਦਸਿਆ ਹੀ ਉਲਟਾ ਚਲ ਕੇ ਉਹ ਵੀ ਬੱਧਾ ਛੱਟੀ ਹੋਈ ਹੈ ਉਹਨਾਂ ਕਰਕੇ ਬਸ ਉਹਨੇ ਜੇ ਸੰਤੋਖ ਇਹ ਜਦ ਇਕੱਠੇ ਕਰਤੇ ਸੇ ਬੰਦੇ ਬਾਦਲ ਦੇ ਸਾਰੇ ਜਿਨ੍ਹਾਂ ਨਾਲ ਦਸਤ ਪਾਛਾ ਦੇ ਕਿਹਾ ਸੀ ਖਾਸੇ ਦੇ ਵੇਲ ਨਹੀਂ ਕਰ ਲੋ ਬੀੜਿਆਂ ਨੂੰ ਸੁਲਤਾਨ ਅਗਰਾ ਜਿਹੜਾ ਸਾਡਾ ਵਿਰੋਧ ਹੈ ਮਤ ਪੇਦਾ ਉਹ ਦੂਰ ਕਰੋ ਮਤ ਪੇਦਾ ਵਿਰੋਧ ਦੂਰ ਕਰ ਪ੍ਰਚਾਰ ਕੀਤਾ ਹੋਇਆ ਜਿਹੜਾ ਉਹਨਾਂ ਦੀ ਮਤ ਪੇਦਾ ਵਿਰੋਸ ਸੀ ਉਹ ਦੂਰ ਕਰਕੇ ਤਾਂ ਲਗਤਾ ਹੋਈ ਸੀ ਉਹੀ ਗੱਲ ਰਹੀ ਹੈ ਉਤਈ ਸਰਗੁਣਿਕ ਮੈਂ ਦੇਣੂ ਭਿਓ ਜੇ ਫਾਇਦਾ ਨਹੀਂ ਤਾਂ ਘੋਟਾ ਕਰਦੇ ਨੇ ਉਹਦੀ ਮਜਬੂਰੀ ਹੈ ਗੁਰੂ ਦਾ ਅਫਰਾਦ ਕੀਤਾ ਹੈ ਗੁਰੂ ਦੀ ਵੱਸ ਦਾ ਪ੍ਰਚਾਰ ਕਰਦੇ ਠੀਕ ਹੈ ਜੀ ਮਾਲਾ ਪੰਜਵਾ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਮਾਨਕ ਨਾਮ ਨਾ ਬਿਸਰੂ ਇੱਕ ਘੜੀ ਕਰ ਕਿਰਪਾ ਭਗਵੰਤ ਹੁਮੇਜਾਲ ਗੋਬਿੰਦ ਰਬੂ ਗੋਬਿੰਦ ਰਬੂ ਗੋਬਿੰਦ ਦੇ ਵਿੱਚ ਰਬ ਚਲ ਇਤੋਂ ਵੱਡਾ ਚਿਰਤ ਕੋਛ ਲਈ ਜੇ ਦਾ ਸੰਤਦਰ ਨੂਨ ਕਾ ਬਰਲੀ ਦੀ ਇਹਦੇ ਵਿੱਚ ਰਬ ਚਲ ਅਰਥਾ ਸਿੱਖੋ ਜਲ ਵਿਲੇ ਰਹਿਣ ਕਿਸ ਤੋਂ ਵੱਡਾ ਕੋਈ ਵੀ ਚਿੰਤ ਨਹੀਂ ਹੈ ਜਦੋਂ ਚਿੰਤਨ ਕਰਦੇ ਆਂ ਸ਼ਬਦ ਵਿਚਾਰ ਕਰਦੇ ਹੋ ਉਹ ਨਾ ਆਖਿਰ ਤੇ ਕੋ ਜਾਂਦਾ ਸਾਧਾਰ ਅਸਾਧ ਅਸਾਧਰ ਅਸਾਧ ਨੂੰ ਸਾਧ ਭੜ ਸਾਧ ਨੂੰ ਸਾਧ ਰੂਪੇ ਹੋ ਜਾਂਦਾ ਇੱਕ ਹੋ ਜਾਂਦਾ ਹੈ ਨਾਮ ਨਾ ਵਿਸਰੂ ਇੱਕ ਘੜੀ ਕਰ ਕਿਰਪਾ ਭਗਵਾਨ ਪਰ ਰਾਮਨਾ ਵਿਸਰਮਾ ਇਤਕਾ ਠੀ ਸਰ ਕਰਪਾ ਵੇ ਭਗਵਾਂ ਤੁ ਕਰਤਾ ਕਰ ਵੇ ਇੱਕ ਕੜੀ ਮੇ ਲੂ ਵਿਸਰ ਕੋ ਜੀ ਔੜੀ ਫੇਰਾ ਕੀਤਾ ਹੋਏ ਤਾਂ ਕਾਹੇ ਡਰਪੀਐ ਦਾ ਤੇਰਾ ਆਪਣਾ ਜੀਅ ਸਦਾ ਹੀ ਕਿ ਇਹ ਉਹਨੂੰ ਬੋਲਣ ਵਾਲਾ ਪਤਾ ਹੀ ਦਾ ਇਹ ਜੀ ਦੇ ਦੇਣਾ ਜੀ ਮਨ ਤੇ ਬੋਲ ਬੁੱਧੀ ਨੂੰ ਦੇ ਬੁੱਧੀ ਆਪੜਾਉਂਦੀ ਹੈ ਇਸ ਮਿਲ ਜਪੀਏ ਨਾਉ ਤੇ ਇਸ ਆਪਣਾ ਜਿਹੜਾ ਮਨ ਆਏ ਬੁੱਧੀ ਨੂੰ ਦੇ ਬੁੱਧੀ ਦੇ ਹਵਾਲੇ ਕਰ ਦੋ ਹਾਂ ਜੀ ਕੋਟਾ ਪੜਾਵਤ ਬਣ ਕੇ ਸਰੀ ਸਾਡੇ ਕੋਈ ਕੋ ਭਗਤੀ ਹੈ ਇਹ ਜੂਟਾ ਮਟਾ ਰੇਡ ਉਪਰੋਂ ਵਾਲੀ ਬੁੱਢੀ ਹੈ ਬੁੱਢੀ ਦਾ ਵਿਹਿਆ ਸਮਝਣਾ ਕਿੱਤ ਦਾ ਵਿਹਿਆ ਸੁਣਿਆ ਹੋਤੀ ਕਿ ਲੈ ਠੀਕ ਹੈ ਜੀ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੂੰ ਜਿਸ ਵੱਲ ਨਿਰੰਕਾਰ ਆਏ ਹੈ ਇਹ ਨਿਹਾਲ ਬੇਸ਼ੁਮਾਰ ਉਹ ਨਿਹਾਲ ਕਲਵਾਲੀ ਬੰਨਿਆ ਗੁਰਦੀ ਚਿੱਤ ਵਿੱਚ ਆ ਗਈ ਆਈ ਐ ਐ ਲੱਗ ਆਈ ਲੱਗ ਠੀਕ ਹੈ ਜੀ ਆਈ ਐ ਚਿੱਤ ਨਿਹਾਲ ਸਾਹਿਬ ਬੇਸ਼ੁਮਾਰ ਆਈ ਹੈ ਹਾਂਜੀ ਆ ਚੁੱਕੀ ਹੈ ਕਿਰਤਨੋਂ ਨਿਹਾਲ ਕਲਨ ਵਾਲੀ ਸਾਹਿਬ ਫਗਵਾੜ ਦੇ ਗੁਰਦੀ ਬੇਸੁਆਰਾ ਜਿਹਦੇ ਵਰਗਾ ਦੂਜਾ ਕੋਈ ਨਹੀਂ ਜਿਹਦੇ ਵਰਗੀ ਬੀਜੀ ਕੋਈ ਨਹੀਂ ਬੇਸੁਆਰਾ ਨੂੰ ਕਹਿੰਦਾ ਜਿਹਦੇ ਕੋਈ ਹੋਵੇ ਹੀ ਨਾ ਠੀਕ ਹੈ ਹੁੰਦਾ ਹੈ ਕੋੜਾਂ ਹੁੰਦਾ ਛੂਣਾ ਹੁੰਦਾ ਹੱਥ ਨਾਲ ਛਾਤੀ ਲਾ ਕੇ શરીਰ ਨੂੰ ਕੋੜਾ ਹੁੰਦਾ ਦ੍ਰਿਸ਼ਟੀ ਨਾਲ ਛੱਕਣ ਨੂੰ ਬਿਨਾਂ ਆਲਤਾਂ ਚਾਚੀ ਕਰਨਾ ਝਾਕ ਕੇ ਦੇਖਣਾ ਉਹਦੇ ਵਾਂਗ ਤਾਂ ਝਾਗਦਾ ਕੋਈ ਜਿੱਥੇ ਵਾਂਗ ਕਰ ਤੇ ਲਾਈਟ ਆ ਉਦੋਂ ਉਹ ਚੱਕਿਆ ਆਪਣੀ ਲਾਈਟ ਫੇਲ ਅੱਛਾ ਕਿਵੇਂ ਜਿਆਦਾ ਆ ਜਾਏ ਬਿਜਲੀयां ਫੁੱਲ ਬਿਜਲੀ ਸੜ ਜਾਂਦੀਆਂ ਐ ਐਡੀ ਬੜੀ ਪਾਵਰ ਵਾਲ ਚੱਕਿਓ ਨੇ ਆਪਣੀ ਆ ਖਲਨੀ ਲਾਈਟ ਫੇਲ ਕਰਨੀ ਆ ਉਹਦਾ ਬੜਾ ਜੀਵਿ ਫਾਲਣ ਦਾ ਜਾਪਟੇ ਨਾਲ ਨਾ ਤੇਰੇ ਹੋ ਜੀ ਸਭ ਕਿਛ ਤਿਸ ਕੇ ਵਸ ਨਾ ਕੋਈ ਬਾਹਰਾ ਤੋ ਭਗਤਾ ਮਨ ਬੁਠਾ ਸਚ ਸਮਾਹਰਾ ਸਭ ਕਿਛ ਤਿਸ ਕੇ ਵਸ ਸਭ ਕੁਝ ਉਹਦੇ ਵਸ ਹੈ ਕੋਈ ਬਾਹਰਾ ਉਹਦੇ ਬਾਹਰ ਕੁਝ ਵੀ ਬਾਹਰ ਕੋਣ ਤੋ ਮਨ ਬੁਠਾ ਸਚ ਸਮਾਹਰਾ ਉਹ ਭਗਤਾਂ ਦੇ ਤੇ ਉੱਠਾ ਉਹ ਹੀ ਬੋਲਦਾ ਭਗਤਾਂ ਦੇ ਸੱਚ ਸੁਨਹਾਰਾ ਇਹਨੂੰ ਸੱਚ ਨੇ ਸੁਆਰਿਆ ਸੱਚ ਦਾ ਹੀ ਸੁਆਰਿਆ ਹੋਇਆ ਜਿਤ ਉਹੀ ਸਮਾਇਆ ਸੁਨਹਾਰਾ ਸੁਆਇਆ ਵਿੱਚ ਸੱਚ ਸੱਚ ਵਿੱਚ ਸਮਾਇਆ ਹੋਇਆ ਠੀਕ ਭਗਤਾਂ ਦੇ ਦੇ ਉੱਤੇ ਉੱਠਾ ਉਹ ਭਗਤਾਂ ਦੇ ਉੱਤੇ ਤਨ ਸਰੂ ਬੁਲਾ ਰਿਹਾ ਹੈ ਤਨ ਤੁਹਾਨੂੰ ਬੋਲ ਰਿਹਾ ਹੈ ਬੁੱਧੇ ਦਾ ਹੁਦੂਆ ਬੁਲਾ ਰਿਹਾ ਹੈ ਅਧੂ ਬੋਲ ਰਿਹਾ ਹੈ ਠੀਕ ਹੈ ਭਗਤਾਂ ਨੇ ਮਨ ਚੋਂ ਹੁਣ ਉਹ ਬੋਲ ਰਿਹਾ ਜਿਹੜਾ ਸੱਚ ਦੇ ਵਿੱਚ ਸਮਾਇਆ ਹੋਇਆ ਭਗਤ ਬਲਾ ਭਗਤਾ ਨੂੰ ਸੁਣ ਰਿਹਾ ਮੇਰੇ ਨਾਲ ਤੇ ਭਗਤ ਸੁਣਾ ਰਿਹਾ ਤੇ ਸਾਨੂੰ ਬੋਲ ਕੇ ਅੱਛਾ ਕਹੋ ਦਾਸ ਧਿਆਨ ਤੂੰ ਰਖਵਾਲਿਆ ਤੇਰੇ ਸਭਨਾ ਸਮਰੱਥ ਨਦਰੀ ਨੇ ਤੇਰੇ ਦਾਸ ਦਾ ਤੇਰੇ ਵਿੱਚ ਤਾਂ ਤੇਰੇ ਵਾਲੇ ਕੀ ਆਖਦੇ ਰਹਿੰਦੇ ਨੇ ਤੇਰੇ ਦਾਸ ਤੇਰੇ ਸਭਨਾ ਸਭ ਪਤਾ ਹੈ ਉਹਨੇ ਦੇਖ ਲਿਆ ਸੁਭੀ ਦੇ ਦੇਖ ਤੂੰ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖ ਲਿਆ ਤੇ ਤੂੰ ਸਭਨਾ ਤੇ ਸਮਰੱਥ ਇਸ ਤੋਂ ਬਰਤ ਕੋਈ ਨਹੀਂ ਤੇਰਾ ਹੱਥ ਰਹੂ ਹੋਰਾਂ ਦੇ ਸਿਰ ਤੇ ਉਹਨੂੰ ਕੋਈ ਖਤਰਾ ਨਹੀਂ ਇਹ ਗੱਲ ਵੀ ਉਹ ਸਮਝ ਰਹੇ ਤਾਂ ਤਾਂ ਤੇਰੇ ਬਲ ਕਾਹਦੇ ਰਹੇ ਤੁਰ ਸਾਵਾਂ ਇਸ ਗੱਲ ਦਾ ਤਾਂ ਤੇਰੇ ਮੰ ਤਕਦੇ ਰਹੇ ਬੰਨ ਕੌਣ ਤਕਦੇ ਕੌਣ ਪੁੱਛਦਾ ਇਹਦਾ ਦੂਰੀਆ ਮਸਲਬ ਦੀ ਹੈ ਹਾਂਜੀ ਆਪਣੇ ਮਸਲੇ ਨੂੰ ਕਾਹਨ ਮਸਲੇ ਦਾ ਕੰਮ ਕਰਦੇ ਨੇ ਇਹ ਕੋ ਨੇ ਮੈਂ ਨਾ ਕੋਈ ਹੈ ਸਰ ਗੋਸ਼ਿਤ ਜਿਹਾ ਕੋਈ ਠੀਕ ਹੈ ਜੀ